ਅਨਿਕੋਪਾ ਹਦਮਾਇਆ ਕੇ ਹੇਤ ਸਰਪਰ ਹੋਬਤ ਜਾਨ ਅਨੇਕ ਅੰਗਪਾ ਤੋਂ ਆਇਆ ਦੇ ਨਾਲ ਹੇਤ ਹੈ ਲੋਕਾਂ ਦਾ ਵੀ ਬਾਯਾ ਹੈ ਹੇਤ ਦੁਸ ਜਿਤ ਵਿੱਚ ਹੈ ਸਾਥੇ ਹੈ ਦੇ ਕੇ ਪੱਖ ਤੋਂ ਲਾਭ ਸੀ ਮਾਇਆ ਤੋਂ ਪਾਣ ਦੀ ਤ੍ਰੇਕਾ ਪੱਖ ਤੋਂ ਆਇਆ ਦਾ ਲੋੜ ਹੈ ਤ੍ਰੇਕਾ ਪਕਾ ਨਹੀਂ ਆਇਆ ਜੀ ਰੋੜਾਂ ਦੇ ਇਹ ਤਾਂ ਤਾਂ ਹੈ ਮਤਲਬ ਸਾਡਾ ਪੜਾਉਣਾ ਹੈ ਮਾਇਆ ਤੋਂ ਇੱਕ ਪ੍ਰਕਾਰ ਦਾ ਭਲਾ ਸਾਡਾ ਸਭ ਲੋਕ ਇਹੋ ਜਿਹੇ ਚੱਲਦੇ ਜਨਨ ਸਾਡਾ ਹਿੱਸੇ ਜੁੜਿਆ ਹੈ ਭਾਇਆ ਨਾਲ ਇੱਕ ਸਰਕਾਰ ਨਾਲ ਫਿੱਟ ਜੁੜਿਆ ਹੈ ਸਾਡਾ ਜਿੱਤਾ ਬਸ ਦੇ ਨਾ ਮਾਇਆ ਕੇ ਹੇਕ ਸਰਪਰ ਹੋਤ ਜਨ ਅਨੇਕ ਸਰਪਰ ਹੁਕਮਾਂ ਦੇ ਆਰਾ ਜਿਹੜਾ ਬਾਕੀ ਜੋ ਹੋ ਰਿਹਾ ਇਹ ਵੀ ਸਾਰਿਆਂ ਦੇ ਸੱਜ ਲੋੜੀ ਪਤਾ ਕਿ ਸਾਠੇ ਬਾਤੇ ਉੱਪਰ ਜਿਹੜਾ ਉਸ ਦਾ ਮਾਇਦੇ ਵੀ ਜੋ ਕੁਝ ਹੋ ਰਿਹਾ ਹੁਕਮ ਦੇ ਨਾਲ ਹੋਈਦਾ ਹੈ ਇਹਦਾ ਹੈ ਇਹਦਾ ਇਹ ਤਾਂ ਹੋ ਰਿਹਾ ਹੈ ਇਹ ਵੀ ਸਾਡੇ ਆਪਣੀ ਹੁਕਮ ਬਸਦਾ ਬਸਰਾ ਜਦ 27 ਸਾਲੇ ਬਸਰੇ ਆਪਨ ਉਹ ਪਤਾ ਨਹੀਂ ਗੱਲ ਵੀ ਵੀ ਦਾ ਜਾਂਦਾ ਧੋਪਣਾ ਜੇ ਉਹ ਤੇ ਬਿਰਖ ਦੀ ਛਾਇਆ ਸੂਰੰਗ ਲਾਵੇ ਉਹ ਬਿਨਸੇ ਉਹ ਮਨ ਤਸਕਾ ਇਹ ਬਿਰਖ ਦੀ ਛਾਇਆ ਵਰਗਾ ਉਹ ਬਿਰਖ ਦੀ ਛਾਇਆ ਸੂਰਜਰ ਦਾ ਬਹੁਤ ਰੱਬੀ ਹੁੰਦੀ ਹੈ ਜੋ ਜੋ ਤੇ ਤੇ ਤੇ ਦਾ ਉਸ ਹਾਵੇ ਉਹ ਚਲੀ ਜਾਂਦੀ ਹੈ ਤੇ ਨੂੰ ਛਾਇਆ ਦੇ ਉਹਦੇ ਜਲਾਂ ਰਹਿ ਜਾਂਦੀ ਹੈ ਫੇਰ ਜੇ ਜੀ ਆਖੀ ਜੀ ਜੁਰੀ ਸੰਤਾ ਤੇ ਕੋਈ ਕਟਾ ਮਾਇਆ ਦਾ ਦਿਵਤੀ ਰੈਜੀਉਂ ਜੇ ਇਹ ਦਰਜ ਹੁੰਦੀ ਹੈ ਕਿ ਕੀ ਹੋ ਰਿਹਾ ਜੀ ਉਹ ਛਾਇਆ ਜਦੋਂ ਹੁੰਦੀ ਆ ਇਹਦਾ ਨਾ ਜਿੱਥੇ ਛਾਇਆ ਉਸੇ ਕਰੰਤ ਹੋ ਰਿਹਾ ਤਾਸੀਦਾ ਜਿੱਥੇ ਛਾਇਆ ਮੇਰੀ ਉਧਰ ਕੋਰ ਹੋ ਜਾਂਦਾ ਇਹ ਜਾਏ ਬੋਆ ਪਰਵਾਪ ਹੋ ਸਾਡੇ ਬੁੱਢੇ ਉਸੇ ਜਿਵੇਂ ਵਰਕਲੀ ছায়ਾ ਤੱਕੀ ਜੇ ਸਰਵਤ। ਇਹ ਆਖਰ ਦੀ ਨਾ। ਕੋਈ ਪ੍ਰੀਆ ਚਾਦ ਨਹੀਂ ਹੋਣਦੀ। ਥੱਲੇ ਇਸ ਕਰਕੇ ਮਾਇਆ ਦਾ ਜਲਾ ਸਾਡਾ ਉਹ ਆਕ੍ਰੀਆ ਸਾਡੇ ਉੱਤੇ ਰੋਸ਼ਨੀ ਨਹੀਂ ਹੋਣ ਹਾਂ ਸਾਰੇ ਦਾ ਪ੍ਰਭਾਤ ਸਾਡਾ ਹੁੰਦਾ। ਅਸਾਂ ਦੇ ਵਿੱਚ ਮੂਰਖਾ। ਮਾਇਆ ਦਾ ਉਹਨਾਂ ਰੋਸ਼ਨੀ ਬਦੂਗੀ। ਫਰਦੂ ਜੀ ਨੇ ਗਿਆ ਜਿੰਨਾ ਵਾਇਆ ਦਾ ਹਨੇਰਾ ਕਟੂਗਾ ਤੇ ਅਸਰੋਂ ਸਾਲ ਪਰੇ ਚੋਦੀ ਨਾ ਹੈ ਰੋਜ਼ ਨਹੀਂ ਜਿਆਦਾ ਪਉਗੀ ਫਿਰ ਲੈ ਜੋਂ ਕਟੂਗੀ ਸੋ ਤਾਂ ਮਾ ਜਲਾ ਨਾਮ શ્રી ਤੋਂ ਆਪਣਾ ਆਪਾ ਮਨ ਹੋਏ ਕਿ ਸ਼ੋਣ ਜੀ ਬੜੀ ਚੌੜੀ ਹੈ ਬੜੀ ਜੋਗਾ ਹੈ ਨਾ ਕਰਨ ਜੋ ਬੜੀ ਹੈ ਬੜੀ ਹੈ ਜੀ ਚੌੜੀ ਆਜੋਨ ਯੋਗ ਕਰੂਗੀ ਜੀ ਗੋਦਸਾ ਸ੍ਰੀ ਜੀ ਬੇਰੀ ਬੇਟੇ ਸਿਰਕੀ ਚਾਇਆ ਦੇ ਸਿਰਕੀ ਚਾਇਆ ਸਿਰ ਉਹ ਬਰਸੇ ਬਿਨਾਂ ਕਾਟਾ ਬਸ ਤਾਂ ਜੇ ਬੈੱਡੋਮੇ ਕੰਮ ਹੀ ਲਾ ਰਹੀ ਸੀ ਸਿਰੀਤੀ ਚਾਇਆ ਆ ਕੇ ਖੜਾਤਾ ਸੀ ਫਿਰ ਵੀ ਉਹ ਨਹੀਂ ਆ ਰਹੀ ਸੀ ਜਾਨਮਾ ਰਹਾ ਲੋਗੇ ਫਿਰ ਉਹ ਜਿਹੜਾ ਇਹ ਜਿਹੜੀ ਛਾਇਆ ਵੇਰਾ ਫਾਇਦਾ ਕਰਦੀ ਹੈ ਸਰੀਰ ਤੋਂ ਉਹ ਫਾਇਦਾ ਕਰਦਾ ਹੈ ਮੇਰਾ ਮਾਇਆ ਦੀ ਛਾਇਆ ਹੁੰਦੀ ਹੈ ਸੱਚੀ ਨਹੀਂ ਛਾਇਆ ਦੀ ਹੁੰਦੀ ਜੋ ਛਾਇਆ ਹੁੰਦੀ ਹੈ ਜੂੜ ਤੋਂ ਤੇ ਤੋਂ ਅਗਿਆਤਾ ਜ਼ਿਆਦਾ ਹੁੰਦੀ ਹੈ ਪਰ ਫਾਇਦਾ ਹੁੰਦਾ ਜੂੜੋਂ ਮੈਂ ਹਮਸ਼ਾ ਮਰੀ ਛਾਇਆ ਦੀ ਹੈ ਜੇ ਮਾਇਆ ਘੜਦੀ ਹੈ ਝੂਠੀ ਤਾਂ ਇਹਨੂੰ ਚਿੰਤਾ ਹੁੰਦੀ ਆ। ਪਰ ਜੇ ਮਾਇਆ ਘੜਦੀ ਹੈ ਤਾਂ ਗਿਆਨ ਹੁੰਦਾ। ਉਹ ਤੇ ਕੁਝ ਹੋਰ ਰੱਖਿਆ ਉਹਦੇ ਚੱਕੇ। ਬੋਲੇ ਦੋ। ਤਰ੍ਹਾਂ ਖੇਤਰ ਪੈ ਗਿਆ। ਜੇ ਕਿਉਂ ਚੱਲਿ। ਅਗਿਆਨ ਦੀ ਮਾਰਾ। ਰੋਸ਼ਨ। ਜੇ ਤਿਆਰ ਕਰਦਾ ਉਹ ਜਗ੍ਹਾ ਰੋਸ਼ਨੀ ਹੋ ਜਾਂਦੀ। ਜੇ ਇਹ ਮੰਨਦਾ ਵੀ ਉਹ ਪਰਮੇਸ਼ਰ ਰਹਿ ਗਿਆ ਕੋਈ ਠੇਰ ਦੀ ਰੋਜ਼ ਮਾਦਾ ਤਾਂ ਫਿਰ ਫਿਰ ਸਮਝ ਵੀ ਲੈ ਗਿਆ ਤੇ ਜੀ ਕਿਉਂਕਿ ਰੋਜ਼ ਕਾਲਾ ਸਮਝ ਨਹੀਂ ਹੁਕਮ ਨੇ ਉਹਦੇ ਆਉਣ ਨੂੰ ਮਿਲਾਇਆ ਗਿਆ ਹੁਕਮ ਜੀ ਜੋ ਲਾਇਆ ਹੁਕਮ ਕੋਲ ਲੈ ਤਾਂ ਉਹ ਫੇਰ ਦੀ ਫਿਰ ਰੋਜ਼ ਕਰਦਾ ਜੇ ਉਹ ਹੁਕਮ ਕੋਲ ਲੈਦਾ ਸੋ ਕੋਲ ਕੋਲ ਪਰਮ ਪਰਮ ਨਾਮ ਜੀ ਕੋ ਦਰਵਾਜ਼ਾ ਵਾ ਅਕੀਤੀ ਪਰਮ ਪਰਵਾਸ ਤੇ ਉਹ ਬੋਲੇ ਪਰਮ ਪਰਵਾਸ ਰੋਸ ਕਰਕੇ ਬੋਲੇ ਰੋਸ ਕਰਕੇ ਬੋਲੇ ਬੇਟਾ ਰੋ ਸਟਾ ਦਰਨਾ ਕਰੇ ਕਿਦਾਂ ਤਾਂ ਕੇ ਹੈ ਗਿਆਨੀ ਰੋਸ ਜੇ ਰੋਸ ਨਾ ਦਾ ਫਿਰ ਪਰਮ ਪਰਵਾਸ ਇਸੇ ਵੇਲੇ ਇਹ ਗੱਲ ਐਤੋਂ ਬਾਹਰ ਜਾਣੇ ਨਾ ਕਹਾਂ ਯਾਰ ਨਾ ਇੱਥੇ ਆ ਗਏ ਤੁਹਾਡਾ ਆ ਗਿਆ ਇੱਥੇ ਖੜਾ ਮਨੁੱਖ ਐਦਾਂ ਕਰਦਾ ਚੰਗਾ ਐਤੋਂ ਨੂੰ ਗੱਲ ਜੰਦ ਐਸੇ ਤੋਂ ਬੁੜਾ ਕਰਕੇ ਇੱਥੇ ਆਇਆ ਉਹ ਦੂਜਾ ਬਾਹਰ ਤੋਂ ਆ ਕੇ ਆ ਕੇ ਜੇਹੜੀ ਆਇਆ ਇੱਧਰ ਗੱਲ ਨਾ ਮਰ ਸੋਦਾ ਇੱਧਰ ਬੱਜਾ ਲੇਂ ਨਹੀਂ ਥਾਰੇ ਇਹਦੀੋ ਗੱਲਾਂ ਇਹ ਤਾਂ 2 ਡਿਗਰੀ ਆ ਉਹ ਤੇ ਫੱਲ ਨਹੀਂ ਲਊਗਾ ਤੇ ਤਾਂ ਰੋਕਿਆ ਆਪਣੀ ਰੋਕਾਂ ਆਈ ਤੁੰਗਾਂ ਆਉਂਦੀ ਗੋਦ ਸਰੇ ਵਾਹ ਜੇ ਦਾ ਰੋਜ਼ੀ ਤੰਡ ਪਿਆ ਫਿਰ ਉਸ ਗੱਲ ਫਿਰ ਉੱਤੀ ਗੱਲ ਉੱਤੀ ਗੱਲ ਆ ਜਿੱਥੇ ਕਹਾਂ ਦਾ ਕੰਘੜਾ ਕਰਾਂਗਾ ਲਾਂ ਕਰਾਂਗੇ ਖੜਾ ਜੀ ਰੋ ਸਾਨੂੰ ਇਹ ਰੋ ਰੰਗ ਅਗੇ ਅੱਜ ਹੈ ਸਰਬਤੈ ਕੁਸੀ ਹੈ ਜੂ ਕੋ ਵਾਹ ਮਿਰਗੀ ਦੀ ਛਾਇਆ ਸੇ ਹੋਰ ਰੰਗ ਲਾਵੇ ਉਹ ਬਿਨਸ਼ੇ ਉਹ ਮਨ ਕਸਾਵੇ ਛਾਇਆ ਹੁੰਦੀ ਹੈ ਗਾੜੀ ਹੁੰਦੀ ਹੈ ਸੂਰਜ ਦਾ ਛਾਇਆ ਵੀ ਲੰਮੀ ਆ ਸੂਰਜ ਦੀ ਰੋਸ਼ਨੀ ਵੀ ਕੱਟ ਹੁੰਦੀ ਹੈ ਛਾਇਆ ਗਾੜੀ ਹੁੰਦੀ ਹੈ ਜਿੱਥੇ ਲੱਭੀ ਹੁੰਦੀ ਹੈ ਛਾਇਆ ਵੀ ਗਾੜੀ ਹੁੰਦੀ ਹੈ ਜੋ ਜਦੋਂ ਸੇ ਨੂੰ ਜਾਂਦਾ ਹੈ ਸ਼ਾਇਦ ਛੋਟੀ ਹੋਈ ਜਾਂਦੀ ਹੈ ਅਰ ਉਹਨਾਂ ਦਾੜਾ ਪੜਉਂਦੀ ਇਹਨਾਂ ਕੋਲ ਤੋਂ ਰੋਜ਼ੀ ਜਿਉਂ ਸੱਚੀ ਆਉਂਦੀ ਹੈ ਜਦ ਸੱਤਿਆ ਜਾਂਦਾ ਪਰ ਸੱਤਿਆ ਬਸ ਦੂਰ ਦੂਰ ਤੱਕਦਾ ਮੇਰਾ ਸੱਤਿਆ ਚੰਗਾ ਫਿਰ ਉਹਨੂੰ ਕੋਈ ਆ ਜਾਂਦਾ ਜਿਵੇਂ ਉਹ ਆਪਣਾ ਅਗਿਆਨਤਾ ਸਸੇ ਦਾ ਜਿਹਦੇ ਪ੍ਰਕਾਰ ਰੱਖੀ ਹੋਈ ਹੈ ਉਹ ਨਹੀਂ ਹੁੰਦੀ ਅਗਿਆਨਤਾ ਸਾਰੀ ਉਹ ਜੜਾਲ ਦੇ ਫਾਦਿ ਲਿਓ ਜੇ ਤੁਹਾਨੂੰ ਜੇ ਤੈਨੂੰ ਕਰੀ ਦਿੱਤੀ ਹੁੰਦੀ ਨੂੰ ਜੇ ਜਾ ਤੇ ਬੇਪਰਵਾਹ ਜਿਹਾ ਜਿਵੇਂ ਬਸ ਉਹਨਾਂ ਕਾ ਡਰ ਤੇ ਜੇ ਜਾਬਾ ਜੀ ਸਾਡੀ ਜੋ ਦੀਸ਼ੇ ਸੋ ਚੰਨਹਾਰ ਲੱਗ ਰਿਹਾ ਹੁੰਦਾ ਹੈ ਅੰਧ ਅਧਾਰ ਜੋ ਦੀਸ਼ੇ ਚੰਨਹਾਰ ਲੋਕਾਂ ਨੇ ਦੀਸ਼ਾ ਚੰਨਹਾਰ ਸਾਰੇ ਆਇਆ ਪਾਇਆ ਨੇ ਜਗਾ ਰੋ ਰਹਿ ਗਏ ਜੇਦਰੋਜ ਬਦਲਦਾ ਲੱਗ ਰਿਹਾ ਹੁੰਦਾ ਹੈ ਅਦਰ ਅਰ ਸੋ ਕੇ ਦੂਹਾਰਾ ਨਹੀਂ ਜਪਿਆ ਦੇ ਰੂਹ ਮੰਦਾਨਾ ਰ ਗਿਆ ਅੰਤ ਦਾ ਬਿਚਾਰ ਇਹ ਚੱਲਣ ਹਾਰ ਇਹ ਵਾਇਰ ਰੇ ਨੂੰ ਚੱਲਣ ਹਾਰਾ ਬੁਣੇ ਰੱਖੀ ਹੋਰ ਜਾਨ ਸੁਪਾਈ ਰੱਖੀ ਵਾਇਰ ਰ ਚੱਲਣ ਹਾਰ ਆਇਆ ਵੀ ਜਦ ਨਹੀਂ ਦੀ ਹੋਰ ਜਾਨ ਹੱਥ ਨਾ ਆਵੇ ਕੇ ਬਟਾਉ ਬਟਾਉ ਬਟਾਉ ਉਹ ਦਾ ਜੇਰਾ ਰਾਤ ਅੰਧਾ ਹੋਵੇ ਬਾੜ ਦੇ ਸਿੱਕੜਿਆ ਹੋਇਆ ਹੋਵੇ ਉਹਦਾ ਉਹ ਗੈ ਨਹੀਂ ਕੰਮੀ ਨਾ ਰਹੇ ਪਾਟੇ ਅਸਰ ਦੇ ਚਾਮ ਨਾ ਤੇ ਜਾ ਰਿਹਾ ਬਟਾਉ ਉਹ ਨਸਮਾਰਦ ਤੇ ਜਾ ਤੇ ਚੜ੍ਹਨਾ ਇੱਕ ਦੁਆ ਦੁਨੀਆਂ ਮੁਟਾ ਰਹੇ ਨਹੀਂ ਆਈ ਲੋਕਾਂ ਦੇ ਆ ਕਿ ਬਟਾਉ ਉਹ। ਸ਼ੱਲਾ ਸ਼ੱਲਾ ਜੀ ਉਡੀਕ ਕਰ ਰਗਾ। ਸ਼ੱਲਾ ਸ਼ੱਲਾ ਜੀ ਨਾ ਜਿਹੜਾ ਸ਼ਰੀਰ ਵੱਡ ਜਾਣਾ ਨਾ ਸ਼ਰੀਰ ਵੱਡਾ ਹੋ ਆਪ ਬਟਾਉ ਦੀ। ਨਾ ਕੋ ਹੱਥ ਨਾ ਦੇ ਕੇ ਹੱਥ ਨਾ ਕਰ। ਉਹਦਾ ਪ੍ਰੋਬਲਮ ਹੈ ਪਵਤ ਸੁਆ ਇਹਦੇ ਮਾਟੀ ਮਾਟੀ ਹੋਈਏ ਉਹ ਨੂੰ ਕਿ ਲੱਭਿਆ ਕੋਈ ਪਰੀਆਦਾ ਜਿਹੜਾ ਸ਼ਰੀਰ ਨਾਲ ਜੁੜ ਗਿਆ ਉਹਦੇ ਪੁੱਛ ਨਹੀਂ ਹੱਥ ਆਇਆ ਕਦੇ ਜਿੱਦੈ ਮੂਰਤੀ ਪੂਜੀ ਕਦੇ ਸਾਰੇ ਲਗੜਦੇ ਜਿੱਦੈ ਵਸਤੀ ਪੂਜੀ ਕਦੇ ਇੱਕ ਵਾਰ ਨਹੀਂ ਛੱਡਿਆ ਗੱਲ ਕਰਦੇ ਬਟਾਉਂਦੇ ਜੁਰਮਾ ਬਿਰੂ ਜੱਤੀ ਜੱਟ ਨੇ ਵੀ ਦੇਖਦੇ ਨੇ ਸੁਭੀ ਘਟਿਆ ਕੱਲ ਕੁਝ ਹੋਰ ਗਏ ਤੇ ਵਿੱਚ ਕੁਝ ਹੋ ਉਸ ਕੋਲੇ ਹੱਥ ਕਦੇ ਕੁਝ ਆਇਆ ਹੀ ਨਹੀਂ ਤਾਂ ਸੁਭੀ ਆਇਆ ਜਿਹੜੀਆਂ ਸਤੀਆਂ ਸਾਰੀਆਂ ਹੀ ਖਤਮ ਕਰਤੀ ਉਸ ਫਸੂ ਹੂੜਾ ਜਿੱਦਣੇ ਜੀਵ ਜਗ ਲਾ ਜੇਕਰ ਨੂੰ ਕੋਈ ਆਉਂਦਾ ਉਹ ਕੰਨ ਜੀ ਨੇ ਪਟਾਉ ਉਹ ਜਪਾਲ ਸਿੰਘ ਨੇ ਲਾਇਆ ਚਾਹੇ ਉਹ ਨਾਕਾ ਚਾਹੇ ਕੋਈ ਹੋ ਰਾ ਚਾਹੇ ਕਬੀਰ ਹੈ ਚਾਹੇ ਉਹ ਜਿੱਜੀ ਹੈ ਬ੍ਰਹਮਾ ਵਿਸ਼ੂਅ ਹੱਥ ਕਰੇ ਕੁਝ ਆਇਆ ਨਹੀਂ ਬੈਣ ਆ ਹਾਂ ਆ ਦੋ ਆ ਜਿਆਦ ਉਹ ਤਾਂ ਸਮਝਦਾ ਥਾ ਉਪੀ ਰੋਇਆ ਇਹ ਤੋਂ ਅੱਥ ਕੁਝ ਨਹੀਂ ਆਇਆ ਬੰਦ ਹਰਕੇ ਨਾਮ ਕੀ ਪ੍ਰੀਤ ਸੁਖਦਾਈ ਹਰ ਉਹਨਾਂ ਨੂੰ ਵੰਤੂ ਗਾਣਾ ਜੀ ਹਰ ਦਾ ਦੋਸ ਉਹ ਤਾਂ ਮੈਂ ਜਪੀ ਕਰੀਆ ਉਹ ਤਾਂ ਸੁਖ ਭੁਲੇਖਾ ਨਾਮ ਕੀ ਪ੍ਰੀਤ ਸੁਖਦਾਈ ਹੈ ਹਰ ਕੀ ਪ੍ਰੀਤ ਸੁਖਦਾਈ ਵਿੱਚ ਹਰਕੇ ਨਾਮ ਕੀ ਪ੍ਰੀਤ ਸੁਖਦਾ ਹਰ ਕੀ ਪ੍ਰੀਤ ਸੁਖਦਾ ਹੈ ਦੀ ਵਰਤ ਕਰਦੇ ਸੋ ਬੋਝ ਦੁਖ ਮਨ ਸੁਖ ਦਾ ਹੱਲ ਨੂੰ ਮਿਲਣਾ ਮੇਰੇ ਯੰਦਾਰ ਸਾਨੂੰ ਹੁਕਮ ਨਾਲ ਹਰੇ ਨੂੰ ਸੁਖ ਦਾ ਹੁਕਮ ਨਾਲ ਮਿਲਿਆ ਨਾ ਪੈਰੂਗਾ ਤੁਮਕੇ ਬਾਲਿਆ ਉਸਾਂ ਨਾਲ ਦੇ ਚਾ ਦਬਟਾਉ ਉਹਦੀ ਉਸਦੀ ਜਨ ਤਬੜਾ ਬਾਧਿਮ ਨੂੰ ਸੇ ਹਰਤਾ ਆਵੇ ਜਿੱਥੇ ਦਾ ਉਹ ਦਿਓ ਪਟੋੜੀਆ ਉਹ ਕਹਿੰਦਾ ਹਰ ਕਹਿੰਦਾ ਬੇਰਾ ਸੁਖदाई ਜਿਹੜਾ ਆਸਾ ਨਾਮਾ ਮੈਂ ਕੀ ਦਾ ਸੁਖ ਦਾਈ ਨੂੰ ਲੋ ਫਰਾਂਦੀ ਮੈਂ ਕਿਹਨੂੰ ਸੁਖ ਦੇਣ ਵਾਲਾ ਇਹ ਆਉਣਾ ਨਹੀਂ ਮਿਲਦਾ ਹਰਤਾ ਜਦੋਂ ਦਾ ਦਰਸਾ ਇਹ ਸੁਖ ਕਿਸੇ ਨੂੰ ਦੇ ਨਹੀਂ ਸਕਦਾ ਆਪ ਝੱਟਾ ਜੇ ਸਾਫੇ ਦੇ ਨਾਲ ਆਲੇ-ਵਲੇ ਦਾ ਸੁਖ ਮਿਲ ਜਾਂਦਾ ਜਿਹਨੀ ਦੱਤਾ ਕੁੜਕੜ ਗਿਆ ਸਰ ਦਿੱਤਾ ਨਹੀਂ ਹੈ ਜਦੋਂ ਜ਼ੋਰ ਵਾਟੇਉਂਦੇ ਆਵੇ ਦਿੱਤਾ ਦਾ ਦੇ ਇੱਕਾ ਜਿਹਾ ਲੇਗਾ ਸਭ ਬੇਪਰਸ਼ਾਨਾ ਜਦੋਂ ਮਨ ਦਾ ਇਹ ਸੰਗਤ ਕਰੇ ਵੀ ਉਹਦਾ ਮਿਲ ਜਾਂਦਾ ਹੈ ਉਹ ਵਿਚੰਨਲ ਨਾਲ ਲੈ ਲੈਂਦਾ ਇਹ ਹਵਾ ਦੂਰ ਵੀ ਦੇ ਸਕਦਾ ਉਹ ਦੇ ਨਾਲ ਹਰ ਪ੍ਰਫ ਸੁਟ ਕੇ ਉਹ ਜਾ ਕੇ ਦੂਏ ਸਾਲ ਲੰਦਾ ਅੱਛਾ ਜਿੱਕੀੜੇ ਰੂਹੇ ਸੱਜਾ ਹੁੰਦਾ ਹੈ ਫੇਰ ਉਹ ਇਥੋਂ ਇੱਥੇ ਵੀ ਲੈ ਕੇ ਪਕਾ ਕੇ ਜਾਂਦਾ ਹੈ ਫੇਰ ਹਾਰਤਾ ਇਸੇ ਜਗ੍ਹਾ ਤੇ ਛੂੰ ਜਗਾ ਦਿੰਦਾ ਗਿਆ ਕੇ ਇਥੋਂ ਚਾੱਕ ਕੇ ਉੱਥੇ ਖਰਾਰ ਜਿਵੇਂ ਆਪ ਕੋ ਬੱਚੇ ਤਾਂ ਕੋਈ ਪਾਉਣੇ ਆ ਕੋਈ ਬੱਚਾ ਆਪ ਦੀ ਪਾਸ ਰਗਾ ਇਹ ਹੱਥ ਹੋਇਆ ਉਹ ਤਾਂ ਸੱਪ ਨਾਲ ਚੱਕ ਆਪ ਜਾਂਦਾ ਜਾ ਕੇ ਕਾਉ ਨੂੰ ਬਣਦਾ ਦਸਤ ਆਪ ਜਾ ਵੀ ਨਹੀਂ ਦੇ ਸਕਦਾ ਬੰਦੇ ਗੱਲ ਹਕੂਮਤ ਹਕੂਮਤ ਤੋਂ ਹੋ ਜਾ ਫਾਇਦੇ ਜਨ ਮ ਕੋਮਲਾ ਹੈ ਰਣਾ ਲੈ ਰਤ ਹੋ ਪਰ ਇਲਾਕੇ ਵਿੱਚ ਅਸਰ ਕਰਦੀ ਹੈ ਚਲਦੀ ਹੈ ਨਾ ਇਹ ਸਰਗਤ ਚਤਨ ਦਾ ਵੀ ਚਲਦਾ ਇਤੋ ਲਖ ਲੈ ਇਸ ਕਰਕੇ ਪੂਰਨ ਬ੍ਰਹਮ ਨਹੀਂ ਕੋਈ ਦੇ ਸਕਦਾ ਪਰਮ ਤੋਂ ਕੁਝ ਆਪਾਂ ਲੈ ਸਕਦੇ ਹਾਂ ਜਾ ਕੇ ਬ੍ਰਹਮ ਦੇ ਨਹੀਂ ਸਕਦਾ ਪਰਮ ਤੋਂ ਕੁਝ ਲੈ ਸਕਦੇ ਹਾਂ ਜਾ ਕੇ ਉਹ ਵੀ ਉਹਨਾਂ ਟੱਚ ਕਰਕੇ ਬਰਫ ਹੈ ਬਰਫ ਨਾਲ ਕਾਚ ਕਰਕੇ ਅਸੀਂ ਕੁਝ ਜਿਹਾ ਹੱਥੀਂ ਕਰਦੇ ਹੱਥ ਲਾ ਕੇ ਪਰਪ ਤੇ ਬਰਫ ਲਾਇਆ ਜਾਂਦਾ ਹੈ ਉਹਦੀ ਲੱਗਦੀ ਆਉਂਦੀ ਅੱਜ ਕਰਦੇ ਵੀ ਜੇ ਆਉਂਦੀ ਬਰਫ ਤੋਂ ਲੈ ਲਿਆ ਕੁਝ ਆ ਕੇ ਉਹਦੀ ਹਵਾ ਪਰ ਦੇਣੀ ਲੱਗ ਜਾਂਦੀ ਹਵਾ ਨੂੰ ਜਾਲੋ ਕਰਦੇ ਪਾਸੇ ਜਮਾ ਕਰਿਆ ਸਤਿਗੁਰੂ ਉਹ ਤਾਂ ਬਾਟੜਾ ਕੋਹਨ ਰੂਪ ਹੋ ਜਾਮੇ ਲੈ ਸਕਦਾ ਜਾ ਕੇ ਜਿਵੇਂ ਪੌੜਾ ਫੁੱਲ ਤੋਂ ਲੈ ਸਕਦਾ ਜਾ ਕੇ ਫੁੱਲ ਫੁੜਾ ਦੇ ਦੇ ਸਕਦਾ ਫੁੱਲ ਆਪ ਲੈਣਾ ਪਊਗਾ ਜਾ ਕੇ ਪਰ ਹੋਕਮ ਕੇ ਗਾਲ ਨਹੀਂ ਹੈ ਹੈ ਖੋਲਦੇ ਵਿੱਚ ਉਹ ਬਕਰਾਂ ਦਾ ਬਕਰਾਂ ਦਾ ਜਦ ਬਕਰਾਂ ਦੀ ਵਾਰਸ਼ ਨਹੀਂ ਪੈਂਦੀ ਨਾਂ ਦੀ ਵਾਰਸ਼ ਨਹੀਂ ਉਹ ਕਿਤੇ ਕਿਤੇ ਜਾ ਕੇ ਦੇ ਦਿੰਦਾ ਵਿੱਚ ਪਿਆ ਸੁਣੋ ਵਰਖਾ ਪਾਣੀ ਤੂੰ ਹੀ ਜਾਏਗਾ ਕਿ ਵਰਖਾ ਦਾ ਮਾਰਾ ਜਦੋਂ ਵੀ ਉਹ ਹੁੰਦਾ ਹੈ ਪਾਰਾ ਦਾ ਪਾਣੀ ਆਪੇ ਖੋਜਦਾ ਹੈ ਸਾਖਾਤ ਰੋਗੋਦੂ ਰਹੋ ਮਾਦੂ ਬੇਕੇ ਨੇ ਸਾਰੇ ਪਾਣੀ ਆਪ ਜਾਗੇ ਦਾ ਨੋਟਾ ਨਾ ਆਏ ਕੇ ਨਾ ਤੇ ਬਾਕੀ ਨਾ ਮੈਂ ਆਏ ਹਾਂ ਕਿਹੋ ਕੀ ਕਰਦੀ ਹੈ ਸਭਣਾ ਜੀ ਆਰ ਐਚ ਦਾ ਹਰ ਆਪ ਆਪਰਾਏ ਦਾ ਇਹ ਫਿਰ ਤੁਸੀਂ ਲੇਖਨ ਆਪਾ ਪੜਾਓ ਉਹ ਉਹ ਹੱਦੀ ਅਗਲੀ ਹਿੱਸੇ ਆ ਆਪਣਾ ਹੈ ਹੁਕਮ ਨਾ ਪੜਾਂਗਾ ਫਿਰ ਹੁਕਮ ਹੈ ਤਾਂ ਮੈਂ ਹਰ ਦਾ ਨਾਮ ਹੈ ਦੱਸ ਨਾਮ ਹੋ ਗਿਆ ਨਾ ਆਪ ਪੜੀਂ ਦੇ ਮਨ ਸਰਕੇ ਨਾਮ ਕੀ ਪ੍ਰੀਤ ਸੁਖਦਾਈ ਹੈ ਹਨੀਰਾਂ ਦੀ ਪੜਤੋਣਾ ਕਿਰਪਾ ਨਾਨਕ ਆਪ ਲੈ ਲਈ ਦੇਖੋ ਹਰ ਕੇ ਨਾਮ ਦੀ ਪ੍ਰੀਤ ਜੋ ਫਰਾਈਆ ਫੈਲਾ ਕੇ ਜੀ ਜੀ ਸੂਨੇ ਦੋ ਵਾਰ ਸਤਿ ਜੀ ਜਸਾ ਉਪਦਾਸ ਹੋਇਆ ਉਹ ਦਮਾ ਦੋ ਫੋੜੀ ਬਾਰੀ ਨੂੰ ਕਰਦੇ ਸਾਡੇ ਗੱਲਿਆਂ ਦਾ ਸਭ ਕੋ ਵੀ ਤਾਂ ਆਪਣੀ ਦੀ ਨਾਮ ਨਾਲ ਬੜਾ ਬਣੀ ਨਹੀਂ ਰਸ ਹੈ ਉਹ ਪਹਿਲੇ ਸੇਤੀ ਸੋਤ ਸਤਿ ਕਿਹੜਾ ਗਿਆ ਇਹ ਅਗਲੀ ਗੱਲ ਆ ਹਰ ਕੇ ਲੋਕ ਦੀ ਪ੍ਰੀਤ ਹੈ ਜਿਹੜੀ ਸੁਬਦਾਈ ਜੀ ਮੈਂ ਤਾਂ ਉਥਰੇ ਕਮਰੇ ਜੇ ਚੜ੍ਹਨ ਦੀ ਸੀ ਕੀ ਆ ਪਰ ਪਰਦੀ ਉਹ ਗੱਲ ਸੀ ਨਾ ਉੱਥੇ ਭਈ ਹਾਰ ਨਾ ਹਰ ਹਾਰ ਹਰ ਦਾ ਵੱਡਾ ਨਾ ਉਹ ਤੋਂ ਦਾ ਸਰ ਸਭ ਕੋ ਮੈਨੂੰ ਖੋਪੜਾ ਹਰ ਵੱਡਾ ਵਾ ਉਹ ਉਹ ਉਤਾਰਨ ਦਾ ਤਾਂ ਕੰਮ ਹਰ ਕਰਦੇ ਤੇ ਮੇਰਾ ਦੂਰ ਹਾਰੇ ਕੁਵਚਦੋ ਤੋਂ ਕਮ ਅਦੇਕਾ ਇੱਕ ਅਦੇਕਾ ਇੱਕ ਦੇ ਹੋਕਮ ਉਹ ਸਾਧਿਆ ਦਾ ਜੋ ਹੋਕਮ ਇੱਕ ਉਹ ਹਰ ਤੰਦੂ ਉਹ ਜਿੰਨੀ ਸੁਗਧਾਈ ਹੈ ਬਾਹਰ ਬਿਠਾ ਲਗੇ ਕਾਹਨ ਸੁਗਧਾਈ ਹੈ ਕਿਉਂ ਲਗੇ ਆਜੂ ਲਗੇ ਕਿ ਤੁਹਾਨੂੰ ਬਜਟ ਵਿਕਤੀਤਾ ਤਾਂ ਹੀ ਪੂਰੀ ਹੋ। ਜੇ ਕਿ ਕਿ ਜੇ ਪੂਰੀ ਤਾਂ ਉਹ ਦਾਮ ਨਾਲ ਆ ਹੀ ਜਿਹੜਾ ਹੋਵੇ। ਉਹਦੇ ਹੱਥੋਂ ਤਾਂ ਦੇ ਰੱਖ ਨਾਲ ਆਸ ਆਸ ਕਰੇ ਦੋਹਰਾ ਕਰੇ ਹੁੰਦਾ। ਹਰ ਤੋਂ ਹਰ ਕੰਮ ਨੂੰ ਗਾਲ ਪਿੱਛੇ ਜਾਂਦਾ। ਹਰ ਤੇ ਯੁੱਤੇ ਕੋਸਾ ਹਰ ਉਹ ਅਜੋਕੇ ਆਦਨਾਰੇ ਬੀਤਾਂ ਗੋਗੋ ਤੇ ਕੰਦੇ ਰਾਤ ਨੂੰ ਹਾਰ ਹੈ ਜਿਹੜਾ ਹਾਰ ਨਾਮ ਸਰੂਪ ਹੈ ਉਹ ਜਿਹੜਾ ਹਾਰਾ ਪੂਰੂ ਰੰਗ ਹਾਲਾਂਕਿ ਬਰਬੋਹ ਹੋ ਗਿਆ ਤੇ ਸੇ ਗਰਮੀਆ ਉਸਦਾ ਹੀ ਨਾਮ ਬਟਾ ਪਿਛੇ ਉਹਨੇ ਕਹੇ ਰਾਮ ਦੇ ਬਟਾ ਰਾਮ ਦਾ ਨਾਮ ਗਿਆ ਹਰ ਕੇ ਨਾਮ ਕੀ ਪ੍ਰੀਸ ਸੁਗਵਾਈ ਕਦੀ ਪਹਿਲੀ ਸੇਜੇ ਬਿਤਾ ਹਰ ਨਾਮ ਨੇ ਉਸਦੇ ਗੁਰਬਾਨ ਦੀ ਜੀ ਹੈ ਤੇ ਪਹਿਲੀ ਸਟੇਜ ਹੈ ਦੂਜੀ ਸਟੇਜ ਅੱਗੇ ਦਾ ਦਰਗਾਹ ਉੱਥੇ ਚੀਜ਼ ਚੱਲ ਗਈ ਦੂਜੀ ਸਟੇਜ ਤਾਂ ਦੋਏ ਦੋਈ ਰੱਖਿਆ ਅਸੀਂ ਜੇ ਤੁਸੀਂ ਪਹਿਲੇ ਉਹ ਤੂੰ ਸਾਰਿਆਂ ਨੂੰ ਹਾਂ ਰੇਡ ਕੋਲ ਵੀ ਆਵਾਂਗਾ ਬেরি ਵਾ ਇਹ ਤਾਂ ਤੁਸੀਂ ਇਹ ਕਿਹਾ ਬ੍ਰਹਮ ਗਿਆਨੀ ਦਾ ਕੋਈ ਨਾਮ ਆਈ ਨਾਮ ਦੋਰਤਾ ਗਿਆਈ ਗਿਆਨ ਵੀ ਆਇਆ ਹੁਕਮ ਵੀ ਆਇਆ ਅੱਜ ਵੀ ਸੇ ਗਿਆ ਅਕਾਦਾ ਦੀ ਗਿਆਨ ਪਦਾਰਥ ਨਾਮਾ ਵੀ ਕਹਿੰਦਾ ਕੱਲ ਪ੍ਰਭਾ ਆ ਗਿਆ ਸੀ ਪਰਬ੍ਰਮ ਦੀ ਸੈਨਸ ਹਾਂ ਆ ਗਿਆ ਸੀ ਅੱਜ ਆ ਗਿਆ ਪ੍ਰਭਾ प्रपार पूर्ण ब्रह्म ने बीच और पूर्ण ब्रह्म सार ब्रह्म के बीच मान वाली का अपन बहुत डिस्कस कर ली प्रपार पूर्ण ब्रह्म के बीच पूर्ण ब्रह्म सार ब्रह्म के बीच ये सैरे की गेम है ऐसे तेने समझ सा लेओ रे मानुया पर छोड़ दिए फिर तो ले ਬੋਲੂ ਬ੍ਰਹਮ ਪਦਮ ਪਲਪਾਰ ਇਹਨਾਂ ਨੂੰ ਤਿਕਿਆ ਤਿੰਨ ਸਭ ਦਾ ਆਵਾ ਆਨੰਦ ਬੋਲੂ ਪਦਮ ਪਲਪਾਰ ਇਹਨਾਂ ਦੀ ਸੇਜ ਕੋਈ ਬਾਣੀ ਉਹ ਬ੍ਰਹਮ ਜਲ ਮੱਦੇ ਤੈ ਗਿਆ ਬ੍ਰਹਮ ਫੂਲ ਨੂੰ ਬ੍ਰਹਮ ਬੀਜਦਾ ਹੈ ਤਾਂ ਬਾਣਜੇ ਗਿਆ ਬੋਲੂ ਬ੍ਰਹਮ ਤਾਂ ਬਣ ਗਿਆ ਬ੍ਰਹਮ ਤੋਂ ਕੋਲੂ ਬ੍ਰਹਮ ਬਣ ਗਿਆ ਪਰਮਾਤਮਾ ਦੀ ਗੱਲ ਛੱਡੋ ਕਨਫਾਜ਼ਾ ਜਹਾਨਾ ਦਾ ਮਾਦਮ ਹੋਣ ਲੱਗਿਆ ਹੈ ਉਹ ਲੋਕਾਂ ਦਾ ਨਾਸ਼ਰ ਜਿੱਦਾਂ ਜਿਹੜਾ ਮਾਦਮ ਹੋਣਾ ਰਿਹਾ ਉਹ ਵੀ ਬਸ ਪਾਣਾ ਹੈ ਯਾਰ ਮਾਨਮਾਨੀ ਆਪੂ ਰੋਪੇ ਹੋਊਂਗਾ ਉਸ ਬੰਦੇ ਬਾਅਦ ਕੋਈ ਤਾਂ ਕੁਲੇ ਪਾ ਲਵੇ ਚਲ ਗੋਰ ਸਰ ਕਾਮ ਨਾ ਬੈਹੋ ਸੋ ਬੇਦੇ ਉਹਦੇ ਬਚਾਵੇ ਦਾ ਗਿਆਨ ਉਹਨਾਂ ਨੂੰ ਵਿਚਾਰੇ ਬਿਰਮਾ ਨੂੰ ਆਹ ਰੱਬ ਤੋਂ ਬਰਬੇ ਕੋ ਧੀਏ ਕੋਈ ਜਾਣਿਆ ਹੋਸੀਏ ਇਹ ਹਾਦਸੇ ਜੀ ਕੇ ਹੋਇਆ ਸੀਗਾ ਥੋੜਾ ਸਮਝਿਆ ਜੀ ਬੇਚ ਬਹੁਤੀ ਲੱਗਦੀ ਸੀ ਆਮ ਆਦਮੀ ਕਹਦਾ ਕਹਿੰਦਾ ਮੈਂ ਤਾਂ ਆਇਆ ਕਿ ਮੈਂ ਉੱਧਰ ਗੱਡਾ ਬਿਲਕੁਲ ਖੜਾ ਸਾਰੇ ਲੋਕਾਂ ਦਾ ਜਦੋਂ ਬਰਤਨ ਪ੍ਰਸਾਦ ਪਤਾ ਤੂੰ ਟੇਕ ਪਹਿਲਾਂ ਹੀ ਸੇਤੋ ਪ੍ਰਖਾੜ ਲਾਦਾ ਉਹ ਦੇਖਾ ਰਿਹਾ ਜਿਹਨੂੰ ਮੈਂ ਮਤਲਬ ਕੀਤਾ ਜਸ ਜਸ ਫੈਮਿਲੀ ਗਾਲੀਆ ਮੇਰੇ ਆ ਜਾ ਕਰੋ ਜੀ ਨੇ ਲੱਭਦਾ ਖੜੂ ਜਿਹਨੂੰ ਫੜਾ ਲਿਆ ਹਾਂ ਬਾਸ ਆ ਜਾਓ ਚਲੋ ਬੱਤਾਂ ਚਲਦਾ ਕਹਿੰਦਾ ਜੇ ਰੱਬ ਕਹਿੰਦਾ ਉਹ ਜਿਹਦੇ ਮਤਾਂ ਦੇਖਿਆ ਉਹੀ ਤਾਂ ਰੱਬ ਹੈ ਆਦਾ ਜਾ ਰੱਬ ਦੇ ਗਿਆ ਸਾਰੇ ਦਾ ਕੁੱਤਾ ਹੈ ਨੇ ਯੂ ਸਰ ਉਹਨਾਂ ਕਾਮ ਜੇਦੀ ਜੈਦਾ ਸੀ ਕੋਈ ਰਾਮੇ ਖੋੜੇ ਤੇ ਮੇਰੇ ਕਾਪਾਲ ਨੂੰ ਸਮਝ ਲੈ ਵੀ ਕਿਹਾ ਜਾ ਕੋਈ ਨਾ ਯਾਦ ਨੂੰ ਦੇ ਸੋ ਜੀ ਰਾਮੇ ਹਰ ਕੇ ਨਾਮ ਸੁਖਾਈ ਕਿਰਪਾ ਨਾਲਿਕ ਆਪ ਲੈ ਬੰਤਲਾਈ ਹਰ ਕੇ ਨਾਮ ਕੀ ਸੁਖਦਾਇ ਜਿਹੜਾ ਹੈ ਇਸ ਕਮਨੂ ਕਹੀ ਹੋਈ ਏ ਗੱਲ ਇਹ ਗੁਰਬਾਣੀ ਆਦ ਕਹੀ ਜਾਂਦੀ ਏ ਇੱਕ ਬੰਦੇਗਾ ਦਸਤ ਸੁਭਰਾਇ ਚਿੰਦੇਗਾ ਮਨ ਹਰ ਕੇ ਨਾਮ ਕੀ ਕੀ ਸੁਖਾਈ ਗੱਲ ਚਹੀਆ ਤਾਂ ਇੱਕ ਬੰਦੂ ਗੱਲ ਚਹੀਆ ਸਤਿਗੁਰਿਆ ਪਹਿਲਾ ਆਦਮ ਬੋਰ ਘਮਾਰ ਕਾ ਕੇ ਬਿਦੂ ਸਿਰਕਤ ਜਨਾਈ ਤੂੰ ਪਹਿਲੀ ਸੇ ਬਿਓ ਗੱਲ ਰਬ ਦੇ ਜਾਉਗਾ ਅਗਰ ਫੇਰ ਦੀਆਂ ਗੱਲਾਂ ਹੋਰ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਗੈਰਫਾ ਨਾਨਕ ਜੀ ਨਾਨਕ ਆਪ ਨੇ ਲਾਈ ਯਾ ਕਰ ਪਾਓ ਉਹਨੇ ਅਸੀ ਕਹਾ ਤਾਂ ਆਪੇ ਨਰਜੋੜਨ ਦਾ ਤੁਸੀ ਤਰੀਕ ਕਰਕੇ ਦੇਖੋ ਤਾਂ ਉਹਨੇ ਯੋਲੋ ਨੇ ਆਪੇ ਲਾਈ ਅਸਲ ਜੋ ਉਹਨੇ ਜੋੜਨਾ ਤੁਹਾਡੀ ਪ੍ਰੀਤ ਨੂੰ ਜੋੜ ਦਿੱਤਾ ਇਹ ਇਹ ਪ੍ਰੀਤ ਦੇ ਵਿੱਚ ਕਾਸ਼ੀ ਸਾਹਿਬ ਨੂੰ ਜੋੜ ਲਿਆ ਜਦੋਂ ਕਾਸ਼ੀ ਗੂੜੀ ਹੋ ਗਈ ਜੋੜ ਲਿਆ ਜਾਗਰ ਦੇ ਬਿਚੇ ਕਹਾਂ ਤੂੰ ਜਾਉ ਜੇ ਤੇ ਸ਼ਕਤੀ ਹੋਵੇ ਤੇ ਉਹਦੀ ਪਾਵਰ ਵਾ ਤਾਂ ਉਹਦੀ ਹੋਵੇ। 체ਦੀ ਪੋਜੂ। ਵਰਮ ਜੀ ਜਾਂਦੋੜੇ ਉਪਰ ਪਕੜੇ ਜੇ ਬਿਚੇ ਸੜ ਜਾਵੇ। ਹਾਂ ਜੀ। ਸਦੀ ਕਿਰਪਾ ਨਾਨਕ ਆਪ ਆਪ ਲੈ ਲਈ। ਹਾਂ ਕਿਰਪਾ ਕਰਕੇ ਨਾਮ ਕਹ ਤਾਂ ਆਪਣੀ ਵਾਲਾ ਆਪ ਹੀ ਆ ਜੋੜਦਾ। ਪਰ ਪ੍ਰੀਤ ਜੀ ਇਹ ਹੈ ਜੀਆ। ਉਹ ਤੇ ਬਣਾਉਂਦੀ ਜਦ ਜੋੜਦਾ ਸੁਖ ਜਦ ਹੁੰਦਾ ਚਾ ਲਾਲ ਲਾਉਂਦਾ ਸੁਖ ਤਾਂ ਹੁੰਦੇ ਉਹ ਲਾਲ ਪ੍ਰੀਤ ਨਾਲ ਲੱਗਦਾ ਜੇ ਪ੍ਰੀਤ ਨਾਲ ਨਹੀਂ ਲੱਗਦਾ ਪ੍ਰੀਤ ਕਿਹਨੇ ਦੱਸੇ ਪ੍ਰੀਤ ਉਹਦੇ ਪਾਣੀ ਚੱਲਣਾ ਹੀ ਹੈ ਪਾਣੀ ਚੌੜ ਚੱਲਣਾ ਦੋ ਪ੍ਰੀਤ ਦਾ ਉਹਦੇ ਵਿਪਰੀਤ ਲੱਗਦਾ ਜੇ ਪ੍ਰੀਤ ਨਾਲ ਖਿਲਾਫ ਸ੍ਰੀ ਦਾਵਤ ਦਵਦਨ ਜੀ ਦਾ ਸ੍ਰੀਤ ਕਾ ਜਪਰੀ ਦਾ ਬਪਰੀਤ ਜੀ ਦਾ ਦਵਦਨ ਸ੍ਰੀਤ ਕੁ ਦਵਦਨ ਕੈ ਲਵਦਾ ਬਪਰੀਤ ਕਾ ਨੇ ਬਰੋਧ ਜਿਤ ਬਰੋਧਾ ਬਪਰੀਤਾ ਜਿਤ ਪਿਆਰਾ ਪ੍ਰੇਮ